श्लोक ਚਰਨ ਕਮਲ बिरहंग खोजंत बैरागी देह दिसै त्यागंत कंपट रूप माया नानक आनंद रूप साद संगमै हां सेवा कमल बिरहंग खोजंत बैरागी ਵਿਛੜਿਆ ਹੈ ਆਪਣੇ ਅੰਦਰ ਆਪਣੇ ਹਿਰਦੇ ਤੋਂ ਵਿਛੜਿਆ ਹੋਇਆ ਹੈ ਆਪਣੇ ਮੂਲ ਤੋਂ ਵਿਛੜਿਆ ਹੋਇਆ ਹੈ ਚਾਹੇ ਉਹ ਮਹਿਸੂਸ ਵੀ ਕਰਦਾ ਹੈ ਮੈਂ ਵਿਛੜਿਆ ਹਾਂ ਹੈ ਪਰ ਖੋਜ ਦਾ ਕੀ ਹੈ ਖੋਜ ਦਾ ਬਾਹਰ ਹੈ ਵਿਛੜਿਆ ਅੰਦਰੋਂ ਹੋਇਆ ਖੋਜ ਦਾ ਬਾਹਰ ਹੈ ਪਹਿਲਾਂ ਖੋਜ ਦਾ ਸੱਚਾ ਬਾਹਰ ਹੈ ਕਿ ਆਖੰਤ ਮਾਰਨ ਕੋਈ ਨਹੀਂ ਉਹਨੂੰ ਪ੍ਰਾਪਤੀ ਹੋਵੇ ਕਿਆ ਗੰਖਾ ਰੂਪ ਮਾਇਆ ਨਾਨਕ ਆਨੰਦ ਰੂਪ ਸਾਚਾ ਸੰਮਾਨ ਪਰ ਕੰਪਟੇ ਛੇ ਤੇ ਬਿਨਾ ਅੰਦਰ ਦਾ ਹੈ ਉਹ ਬਾਹਰੋਂ ਦਾ ਪਰ ਯਾਰ ਅੰਦਰ ਕੋਈ ਜਾਣੀ ਹੋਵੇ ਬਦਰਾ ਹੈ ਬਾਹਰ ਕਾ ਤੇ ਢੋਲ ਬਾਹਰ ਦਾ ਉਹ ਦੇਖਤੋਂ ਬਾਹਰ ਤੋਂ ਅੰਦਰ ਖੋਜੂ ਜੇਦਾ ਉਹ ਤਾਂ ਛੱਡ ਕੇ ਹੋ ਸਕਦਾ ਪਰ ਤਾਂ ਕਹਿੰਦੇ ਅੰਦਰ ਹੈ ਅੰਦਰ ਵੀ ਗਲਮਾ ਨਹੀਂ ਕੋਈ ਬਾਹਰ ਫਿਰਦੇ ਹੋ ਕਿਉਂ ਸਾਡੇ ਵੱਡੇ ਵੱਡੇ ਨਾ ਬਾਹਰ ਹੀ ਜੋ ਹੋ ਗਿਆ ਉਹ ਤਾਂ ਕਰਦੇ ਇਹ ਕੱਪਾ ਨਾਲ ਦਾ ਆਨੰਦ ਰੂਪ ਸਾਧ ਸੰਗਮ ਹੈ ਜੇ ਸਾਧੀ ਸੰਗਤ ਕਰੂ ਅੰਦਰ ਹਿਰਦੇ ਚ ਜਾ ਕੇ ਆਪਣੇ ਮੂਰ ਨਾਲ ਜੁੜੂਗਾ ਜਿਹੜਾ ਆਇਆ ਮਨ ਜਿਹੜਾ ਅੱਦਾ ਹੈ ਉਹ ਸਾਧ ਹੈ ਜੁੜਦਾ ਜਾ ਕੇ ਤਾਂ ਸਾਧ ਹੁੰਦੀ ਹੈ ਪਰ ਸਾਧ ਹੋਇਆ ਮਨ ਹੀ ਅੰਦਰ ਜੁੜਦਾ ਹੈ ਹੋਇਆ ਸਾਧ ਯਾਰ ਇਹ ਤਰ੍ਹਾਂ ਅੰਦਰ ਆਪਣੇ ਜਾ ਕੇ ਆਪਣੇਲੇ ਘਰ ਬਾਨ ਮੈਂ ਫਿਰ ਵਿਆਹ ਕਰਕੇ ਦੇਖੇ ਫਿਰ ਸੱਜਿਆ ਹੋਇਆ ਸਹੀਂ ਬਾਹਰੋਂ ਦੇਖਦਾ ਬਾਬਾ ਬਾਹਰੋਂ ਤਾਂ ਅਸਾਦ ਹੈ ਨਾ ਅਸਾ ਕਿਹਾ ਮਨ ਸਾਈਂ ਮੁਖ ਉਚਰਾਂ ਵੱਤਾਂ ਲੋ ਮਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਈ ਮਨ ਦੇ ਵਿੱਚ ਛਾਈ ਹੈ ਜਿਹੜਾ ਉਹ ਨਹੀਂ ਸੋਪਾ ਉਚਾਰਨ ਕਰੋ ਉਹਨੂੰ ਕਹੋ ਵੀ ਹਾਂ ਮਨ ਵਿੱਚ ਹੈ ਇਹ ਮਗਲ ਮੰਨੋ ਔਰ ਦੱਸੋ ਮਨ ਲੈਣਾ ਅਸੀਂ ਦੱਸਦੇ ਨਹੀਂ ਲੋਕਾਂ ਨੂੰ ਇਹ ਕਿਉਂ ਕਰ ਜਾਂਦੇ ਗੋਖੋ ਜਿਹੜਾ ਇਹ ਹੀ ਕਰਨਾ ਮੈਂ ਤਾਂ ਉਹੀ ਚੜਨ ਕਰ ਵੀ ਅੰਦਰ ਹੈ ਮੈਂ ਤਾਂ ਕਹਿੰਦਾ ਨਹੀਂ ਬਾਹਰ ਦੱਸਦੇ ਰੱਬ ਇਹ ਅੰਦਰ ਹੀ ਉਹ ਤਾਂ ਹਿਰਦੇ ਵਿੱਚ ਵਸਦਾ ਬਾਹਰ ਕਦੇ ਢੋਂਦੇ ਕਤ੍ਹਾ ਬਲੋ ਜੀਤਿਆਂ ਗੋਜਨ ਆਰ ਸ਼ਬਦ ਦੇ ਵਿੱਚ ਚਾਨਣ ਸਾਰੀਆਂ ਲੋਾਂ ਜਿਹਦੇ ਵਿੱਚੋਂ ਪੈਦਾ ਹੋਣ ਜਾਂਦੇ ਜਿਸ ਦੇ ਕਰਨ ਸਭ ਨੇ ਚਾਨਣ ਹੋਏ ਜਿਹੜਾ ਕਾਰਨ ਹੈ ਤੁਹਾਡੇ ਜੀਵ ਜੀ ਦੇ ਵਿੱਚੋਂ ਪੈਦਾ ਹੋਇਆ ਜਿਹੜਾ ਹਰਦੇ ਮੌਤਾ ਗੁਰਦੇ ਪਿਤਾ ਹੈ ਉਹ ਬਹੁਤ ਅੰਦਰ ਹੈ ਉਹ ਇਹ ਗੱਲ ਨੂੰ ਮੰਨੋ ਹਰ ਇਸੇ ਦਾ ਉਪਦੇਸ਼ ਕਰੋ ਲੋਕਾਂ ਨੂੰ ਮੈਂ ਉਹੀ ਕਰਦਾ ਨਾਨਕਾ ਬਰਕੂਰਿਆ ਹੁਣ ਜੀਵਾਂ ਸੱਚੀ ਸੋਏ ਜਿਹੜੇ ਇਹ ਨਹੀਂ ਕਹਿੰਦੇ ਜਿਹੜੇ ਬਾਹਰ ਮੂਰਤੀਆਂ ਬਣਾਈ ਬੈਠੇ ਨੇ ਉਹ ਦਰਸ਼ਨ ਦੀ ਗੱਲ ਕਰਦੇ ਨੇ ਪਰ ਕੁਝ ਵੀ ਮਾਹੌਲ ਆਕਸ ਨੇ ਉਹ ਜੋ ਦਰਸ਼ਨ ਜਿਹੜੇ ਕਰਦੇ ਨੇ ਪਰਉਂਦੇ ਨੇ ਉਹ ਸਭ ਅੰਦਰੀ ਨੇ ਉਹ ਚ ਨਾ ਵਾਯੋ ਤੇ ਮਾਇਆ ਹੀ ਔਰ ਕੁਝ ਨਹੀਂ ਹਾਸੋ ਹੁਣ ਜੀਵਾਂ ਸੱਚੀ ਸੋਏ ਮੈਂ ਤਾਂ ਸੱਚੀ ਸੋਚਾ ਹੋਂਤੇ ਹੀ ਸੱਚੀ ਬਾਣੀ ਕਹੋਂਤੇ ਹੀ ਮੇਰਾ ਜੀਵਨ ਹੈ ਇਹ ਉਹ ਸੱਚੀ ਬਾਣੀ ਮੈਂ ਬੋਲਾਂ ਆਖਾਂ ਜੀਵਾਂ ਵਿਸਰੇ ਮਰ ਜਾਊ ਸੱਚ ਬੋਲਣ ਦੇ ਵਿੱਚ ਸੱਚ ਆਖੇ ਜੀਵਨ ਸੱਚ ਵਿਸਰਣ ਦੇ ਵਿੱਚ ਮੰਦਾ ਜਿਹੜੇ ਸੱਚ ਵਿਸਰ ਜਾਣਗੇ ਕੋਈ ਉਹ ਮਿੱਟੀ ਦਾ ਸਰੀਰ ਹੀ ਹੈ ਉਹਨਾਂ ਦੀ ਮੌਤ ਹੀ ਮੌਤ ਹੈ ਜੀਵਨ ਜੀਵਨ ਵਿੱਚ ਸੱਚ ਨਾਲ ਜੁੜਨ ਰੋਜ਼ੀ ਜੀ ਸਾਡੀ ਪੌੜੀ ਬਸਤਾ ਟੁੱਪੀ ਝੂੰਪੜੀ ਏਰ ਸਭ ਜਿੰਨਾ ਜਾਤ ਨਾ ਪਤ ਨਾ ਆਦਰੋ ਉਦੇਨਾਂ ਪਰਮਿਨਨਾ ਯਾਨੀ ਉਹ ਜਿਹੜਾ ਭਗਤ ਹੈ ਆਪਣੇ ਮੂਲ ਨਾਲ ਜੁੜਿਆ ਹੋਇਆ ਮੂਲ ਦੀ ਗੱਲ ਕਰਨ ਵਾਲਾ ਉਹ ਚਾਹੇ ਰਵਿਦਾਸ ਵਰਗਾ ਟੁੱਪੀ ਝੂੰਪੜੀ ਦੇ ਵਿੱਚ ਬਸ ਆਵੇ ਟੁੱਟੀ ਝੂੰਪੜੀ ਹੋਵੇ ਫੇਰ ਫਟੇ ਹੋਏ ਕੱਪੜੇ ਹੋਣ ਸਭ ਜਿੰਨਾ ਕੱਪੜੇ ਸਾਰੇ ਫਟੇ ਹੋਏ ਹੁਣ ਜਾਤਨਾ ਜਾਤ ਵੀ ਨਾ ਹੋਵੇ ਉਹਦੀ ਚੰਗੀ ਕੋਈ ਇੱਜ਼ਤ ਵੀ ਨਾ ਹੋਵੇ ਸਮਾਜ ਵਿੱਚ ਉਹਦੀ ਕਰਦਾ ਉਹ ਵਿਹਾਨ ਪਰਮੰਨਾ ਚਾਹੇ ਬਾਹਰ ਵਿਚਾਰਾ ਅਵਦੀ ਤੋਂ ਅਲੱਗੇ ਰਹਦਾ ਮਤਲਬ ਜਗਾ ਨਾ ਹੋਵੇ ਉਹਦੇ ਕੋ ਉਹ ਵਿਹਾਨ ਪਰਮੰਨਾ ਵਾਰ-ਵਾਰ ਵਾਰ ਰਹਿੰਦਾ ਹੋਵੇ ਜਿੱਥੇ ਸਸਤੀ ਜ਼ਮੀਨ ਹੁੰਦੀ ਹੈ ਅੱਛਾ ਜੀ ਮਿੱਤਰ ਤਨ ਰੂਪਹੀਣ ਕਿਛ ਸਾਥ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਮਨ ਭਿੰਨਾ ਵਿਤਲ ਨਾ ਵੇਦਾ ਕੋਈ ਤਨ ਮੇਂ ਨ ਹੋਵੇ ਕੋਲ ਕੋ ਨਾ ਰੂਪ ਹੀ ਦੇ ਜੋਗ ਚੰਗਾ ਰੂਪ ਵਾਲਾ ਵੀ ਨਾ ਹੋਵੇ ਕਿਛ ਨਾ ਕੋਈ ਉਹਦਾ ਰਿਸ਼ਤੇਦਾਰ ਹੋਵੇ ਨਾ ਕੋਈ ਉਹਦੀ ਮਦਦ ਕਰਨ ਵਾਲਾ ਹੋਵੇ ਕੋਈ ਉਹਦੀ ਬਾਹ ਫੜਨ ਵਾਲਾ ਮਾਇਆ ਮਾਇਕਤਾ ਵਰਕੇ ਰਾਜਾ ਸਗਲੀ ਸਿਸ਼ਟਾ ਦਾ ਨਾਮ ਰਸਤੇ ਨਾ ਜੇ ਹਰ ਨਾਮ ਦਾ ਆ ਉਹਦਾ ਮਨ ਤੇ ਗਿਆ ਹੋਵੇ ਤਾਂ ਉਹ ਸਾਡੀ ਸਿਸ਼ਟਾ ਰਾਜਾ ਹੁੰਦਾ ਉਹਦਾ ਸਿਸ਼ਟਾ ਰਾਜਾ ਹੁਣ ਸਿਸ਼ਟਾ ਰਾਜਾ ਕਦੀ ਜਬਾਨੀ ਸਕੂ ਹੈ ਐਕਚੁਅਲੀ ਸਿਸ਼ਟਾ ਰਾਜਾ ਤਾਂ ਹੈ ਨਹੀਂ ਸਿਸ਼ਟਾ ਰਾਜਾ ਇਸ ਸੈਂਸ ਨਾਲ ਹੈ ਉਹ ਹੁਕਮ ਵਿੱਚ ਸਮਾਇਆ ਹੋਇਆ ਉਹਦੀ ਸੁਰਤ ਸ਼ਬਦਾਂ ਨਾਲ ਜੁੜੀ ਹੋਈ ਹੈ ਸ਼ਬਦ ਦਾਰਾ ਚੱਲਦਾ ਤੇ ਹੁਕਮ ਦਾ ਰਾਜ ਚੱਲਦਾ ਉਹ ਜਦੋਂ ਹਕੂਮਤ ਕਿ ਜਿਉਂਦਾ ਹੀ ਸਮਾਇਆ ਹੋਇਆ ਹੈ ਹਕੂਮਤ ਦਾ ਰਾਜ ਚੱਲਦਾ ਹੈ ਉਹ ਉਹਦਾ ਹੀ ਰਾਜ ਚੱਲਦਾ ਮੰਨਿਆ ਜਾਂਦਾ ਹੈ। ਆ ਸਰਕਾਰ ਕੀ ਉਹਨਾਂ ਦੀ ਕਿੱਚ ਨੇੜੇ ਦਾ ਕੋਈ ਬਹੁਤ ਮਦਦ ਕਰਨ ਵਾਲਾ। ਠੀਕ ਹੈ ਜੀ। ਮਨ ਉਧਰ ਹੈ ਪ੍ਰਭ ਹੋਏ। ਤੂੰ ਪ੍ਰਸੰਨ ਤੂੰ ਉਹਦੇ ਗਿਆਨ ਦੀ ਤੂੰ ਰਣਾ ਉਹ ਜੋ ਉਪਦੇਸ਼ ਕਰੂਗਾ ਜੋ ਗੱਲ ਤੋਂ ਹੋਗਾ ਜੋ ਇਹ ਗਿਆਨ ਹੈ ਉਹਦੀ ਤੂੰ ਜੇ ਮਨੋਂ ਲੱਗ ਮਨ ਸਾਫ ਗੱਲ 'ਚ ਜੋ ਗਿਆਨ ਹੈ ਉਹੀ ਹੈ ਉਹਦੇ ਨਾਲ ਮਨ ਸਾਫ ਹੋ ਜਾਂਦਾ ਮਨ ਨਿਰਵਨ ਹੋ ਜਾਂਦਾ ਉਧਰ ਹੈ ਪ੍ਰਭ ਹੋਏ ਤੂੰ ਪ੍ਰਸੰਨ ਸਤਿ ਸ਼ੰ ਪ੍ਰਸੰਨ ਹੋ ਗਏ ਤੇ ਪ੍ਰਭ ਸੁ ਪ੍ਰਸੰਨਾ ਦਾ ਬਧਵਾ ਜੇ ਉਹ ਆਦਮੀ ਅੰਦਰੋਂ ਚਾਹੁੰਦਾ ਹੋਵੇ ਉਹ ਪ੍ਰੇਮ ਕਰੇ ਉਸ ਗੱਲ ਨਾਲ ਤਾਂ ਹੀ ਉਹਦੇ ਤੇ ਪ੍ਰਭਰਥਨ ਹੁੰਦਾ ਤਾਂ ਹੀ ਉਹਦਾ ਮਨਸਾਬ ਹੁੰਦਾ ਜੇ ਉਹਦੀ ਗੱਲ ਕਹੀ ਉਹ ਨਾ ਪ੍ਰੇਮ ਨਾ ਕਰੇ ਨਾ ਇਹ ਨਹੀਂ ਉਹਦਾ ਮਨਸਾਬ ਹੁੰਦਾ ਕਹਿਣ ਦਾ ਮਤਲਬ ਸਾਰਿਆਂ ਦਾ ਮੰਨ ਜੀ ਸਾਫ ਹੁੰਦਾ ਇਹ ਇੱਕੇ ਬੰਦੇ ਦੀ ਗੱਲ ਨਹੀਂ ਹੋਰੀ ਜਿਹਦੀ ਪਿੱਛੋਂ ਚੱਲ ਰਹੀ ਹੈ ਤਿਸ ਧੂੜ ਮਨ ਉੱਧਰ ਹੈ ਪ੍ਰਭ ਹੋਏ ਸੁ ਇਹ ਇੱਕੇ ਪਿਛਲੇ ਉਹ ਭਗਤ ਨੇ ਗੱਲ ਚਲਾਈ ਉਹ ਜਿਹੜਾ ਹੈ ਸਦੀ ਸਿੱਖ ਦਾ ਰਾਜਾ ਉਹਦੀ ਧੂੜ ਹੈ ਜੀ ਅੱਛਾ ਜੀ ਦੇਖੋ ਨਾਨਕ ਮੈਂ ਜੋ ਗੱਲ ਕਹੀ ਹੈ ਸੰਤਨ ਕੀ ਰੇਤ ਪਿਆਰੇ ਹਉ ਸੰਤਰੀ ਦੀ ਸ਼ਰਨ ਨਾਨਕ ਤੂੜ ਮੰਗੇ ਇਸ ਗੁਰਸਿੱਖ ਦੀ ਜੋ ਆਪ ਜਪਾ ਨਾਮ ਜਪਾ ਵਾ ਉਹ ਤੂੜ ਕੀ ਹੈ ਉਹ ਤੂੜ ਦੇਖੋ ਭਾਈ ਗਿਆਨ ਕੀ ਆਈ ਜਾਂਦੀ ਜੋ ਵੀ ਗੱਲ 'ਚ ਗਿਆਨ ਆਂਦੇ ਵੰਗੋ ਪਾਓ ਗਿਆਨ ਛੂੜੇ ਹੋਦੀ ਛੂੜਦਾ ਜਾ ਜਾਂਦਾ ਗਿਆਨ ਸਾਰਾ ਠੀਕ ਹੈ ਜੀ ਗਿਆਨ ਉਹਦੀ ਗੱਲ 'ਚ ਢੂੜ ਹੁੰਦੀ ਆ ਗਿਆਨ ਤੇ ਪ੍ਰਭ ਹੋਏ ਸੋ ਤੇ ਪ੍ਰਭ ਪ੍ਰਸੰਨ ਹੁੰਦਾ ਹੈ ਹੋਵੇ ਜੇ ਛਰਤ ਨਾਲ ਤਾਂ ਉਹਦਾ ਮਨ ਨਿਰਮਲ ਹੋਊਗਾ ਪ੍ਰਭ ਪ੍ਰਸੰਨ ਤਾਂ ਉਹ ਜੇ ਆਪਣੇ ਅੰਦਰ ਆਤਮਾ ਉਹਦੀ ਗੱਲ ਨੂੰ ਮੰਨੂਗੀ ਇਹਦਾ ਅੰਤਰਾਤਮਾ ਕਰਕੇ ਮੰਨਦਾ ਨਹੀਂ ਨਾ ਹੈਗਾ ਹਾਂਜੀ ਗੁਰਬਾਣੀ ਨੂੰ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਗੁਰਬਾਣੀ ਦਾ ਤੇ ਅਸਰ ਨਹੀਂ ਹੁੰਦਾ ਸਾਰਿਆਂ ਤੇ ਨਹੀਂ ਅਸਰ ਹੁੰਦਾ ਹੈ ਨਾਟਕ ਦੀ ਗੱਲ ਦਾ ਸਾਰਿਆਂ ਤੇ ਅਸਰ ਨਹੀਂ ਹੋ ਗਿਆ ਕੋਈ ਪ੍ਰਭ ਪ੍ਰਸੰਨ ਨਹੀਂ ਨਾ ਹੋਇਆ ਠੀਕ ਹੈ ਜੀ ਹਾਂ ਇੱਥੇ 7ਵੀਂ ਪੌੜੀ ਸਮਾਪਤੀ ਹੈ ਜੀ